ਚਿੱਟਾ ਦੇ ਖੁੱਲਾ ਇੱਕ ਗੰਢ ਛੇ ਆ ਨਿਤਖੋ ਜਗ ਹੰਡ ਚਿੱਟਾ ਦੇ ਦੇਦੇ ਛਿਜ ਰਹੀ ਹੈ ਰੋਜ ਅੱਲੇ ਵਿੱਚ ਵਾਲ ਨੇ ਵੀ ਅੰਦਰ ਦੀ ਗਿਆਨ ਛਿਜ ਰਹੀ ਹੈ ਬਾਲ ਦੀ ਦੇ ਲਿਆ ਜਣ ਛਿਜ ਰਹੀ ਹੈ ਠੀਕ ਹੈ ਚਿੱਟਾ ਦੇ ਖੁੱਲਾ ਇੱਕ ਇੱਕ ਗੰਢ ਗੰਢ ਜੇ ਇਹਦੀ ਕਪੜਤੀ ਗੰਢ ਖੋਲ ਦੇਵੇ ਤਾਂ ਇਹ ਜਿੱਤੇ ਚ ਜਾਂਦੀ ਹੈ ਅੱਛਾ ਜੀ ਇਹਦੀ ਗੰਢ ਖੋਲ ਦੇਵੇ ਲੋੜੂ ਆਹ ਜੇ ਇਸ ਦੇ ਨਾਲ ਉਹ ਵਾਲੀ ਗੰਢ ਖੋਲ ਦੇਵੇ ਕੀ ਜਾਇ ਇਸ ਕਰਕੇ ਛਿੱਛਦੀ ਹੈ ਕਿ ਮਾਇਆ ਨਾਲ ਗੰਢ ਪਈ ਹੋਈ ਹੈ ਇਹਨੇ ਬੋਹੜਾ ਨਾਲ ਜੁੜੀ ਹੋਈ ਹੈ ਮੰਨੋ ਛੇ ਆ ਦੇਖੋ ਜਗ ਹੰਡ ਛੇ ਅਨਿਤ ਅੱਛਾ ਜੀ ਛੇ ਅਨਿਤ ਅੱਛਾ ਤਾਂ ਅਨੇਤ ਜਈ ਦੇਖੋ ਅਨਿੱਤ ਬਣ ਜਾਂਦਾ ਫਿਰ ਜੀ 6 ਅਨਿੱਤ 6 ਅਣਾਉਟ ਦਾ ਹਾਂਜੀ 6 6 ਜਦ ਦਿਲ ਦੇ ਵਿੱਚ 6 ਹਾਂਜੀ 8 ਲੱਖ ਵਿੱਚ ਲਾ ਕੇ ਹੀ ਬਣਦਾ 6 ਹਾਂ ਬਦਤ ਹੂੰ ਹੂੰ ਅੱਛਾ ਜੀ 2 ਆੜੇ ਦੇ ਬਣਦਾ ਗਿਆਨਿਤ ਦੇਖੋ ਜਾਂ ਹੰਡ ਇਹਦਾ ਨਾਸ ਬੰਤ ਹੈ ਅਜੀਬ ਆਲਾ ਅਜੀ ਗਿਆਨਦਰੇਸ਼ੇ ਮੇਂ ਦਿਮਾਗ ਹੈ ਜੋ ਇਹ ਦਿੱਤਾ ਹੈ ਦੇਖੋ ਜਾਂ ਹੰਡ ਸਾਰੇ ਜੰਗ ਫਿਰ ਤੁਰ ਕੇ ਦੇਖ ਲੋ ਬਚਿਆ ਸਰੀਰ ਹੈ ਬਾਲਾ ਇਹਦੀ ਬਚਿਆ ਨਾ ਬਚਦਾ ਦੇਖੋ ਜਾਂ ਹੰਡ ਤੋ ਪਛਾਮ ਜੇ ਸੰਕਰ ਜਾਣਾ ਬੰਦਲ ਕਾਟ ਮੁਗਰ ਚਾਣਾ ਤੋ ਪਛਾਵ ਜੇ ਕਰ ਕਰ ਜਾਣ ਜੇ ਸੋਗਰ ਦੁਖ ਨੂੰ ਬਰਾਬਰ ਬੋਲ ਕੇ ਚੱਲੇ ਹ ਹ ਅਪਰੇ ਕੰਦ ਮੁਕਤਾ ਰਗ ਗਿਆ ਇਹ ਕਿ ਜਬੰਦੋ ਜੁਨੀ ਹੈਗਾ ਅਜ ਤਨ ਦੁੱਖ ਸੁਖ ਕਰਕੇ ਹੀ ਲੱਗਦਾ ਹੈ ਬੁੱਧ ਨੂੰ ਕਿ ਲੋ ਸੁਖ ਬਰਾਬਰ ਦੇ ਸੁੱਖ ਨਾਲ ਹੋਣੀ ਠੀਕ ਹੈ ਨਹੀਂ ਜੇ ਗਿਆਨ ਇਸ ਤਰ੍ਹਾਂ ਜੇ ਬਸਿਆ ਆਇਆ ਦਿਮਾਗ ਦੇ ਫਰਖ ਹੈ ਦੁੱਖ ਸੁਖ ਮਹਿਸੂਸ ਕਰਦਾ ਹੈ ਝਾਕੇ-ਝਾਕੇ ਮਹਿਸੂਸ ਕਰਦਾ ਠੀਕ ਹੈ ਇਹ ਗੋਪਤਾ ਜਰੂਰ ਟੁੱਟਿਆ ਹੋਇਆ ਤੇ ਗੁੜੀ ਟੁੱਟਾ ਦਾ ਟੁੱਟਾ ਦਾ ਦਸ ਦਵਾਰ ਖੁੱਲਿਆ ਤੇ ਗੁੜੀ ਛੜਤੀ ਜਿਆਨਾ ਬਲੈਂਟ ਨੇ ਟੁੱਟ ਗਿਆ ਜਗਤ ਪੁਨਾਣਾ ਲਿਖਿਆ ਕਿਰਤ ਪੁਰੇ ਪਰਵਾਨਾ ਤੁਰੇ ਪਰਵਾਨਾ ਛਾਇਆ ਛਾਇਆ ਮਾਇਆ ਛਾਇਆ ਹੀ ਹੈ अच्छा जी। ਆਇਆ ਕੋਛਵਲੀਆ ਜਾਇਆ ਹੈ। ਝਾਇਆ ਹੈ। ਗਿਆਨ ਦੀ ਦ੍ਰਿਸ਼ਟੀ ਤੇ ਬੁਰੇ ਛਾਇਆ ਹੈ ਗੋਆ। اچھا ਜੀ। ਇਹਦਾ ਹੀ ਪਰਛਾਇਆ ਹੋਇਆ ਇਹਦੇ ਕਰਕੇ ਪਰਛਾਇਆ ਹੋਇਆ ਹੈ ਅੰਦਰ। ਚੂਚੀਆ, ਥੋਟੀਆ ਵਿੱਚ ਕੁਛ ਨਹੀਂ ਹੈ ਤੇ। ਸੱਚ ਨਹੀਂ ਹੈ ਤੇ ਵਿੱਚ ਜੇ ਬੱਤੀ ਨੂੰ ਹੋਜ ਲੋ ਸਕੇ ਤੇ ਵੀ ਖੈਦੀ ਚੂਚੀਆ। ਸੱਚ ਤੋਂ ਸਖੜੀ ਹੈ ছায়ਾ ਚੂਚੀ ਹੈ ਪੁਲਾਨਾ ਅੱਜ ਯਾਗ ਦੇ ਵਿੱਚ ਪੜਿਆ ਫਿਰ ਜਗਤ ਪੁਲਾਨਾ ਜਿਹੜੀ ਕੀ ਜੀ ਹੈ ਗੜਵੀ ਖਾਲੀ ਭੱਜੇ ਫਿਰਦੇ ਹਾਂਜੀ ਕੋਈ ਬੋਲ ਕੇ ਬਹੁਤ ਵੱਡੀ ਉਹਦੀ ਮਗਰ ਭੱਜੇ ਫਿਰਦੇ ਨੇ ਐ ਖਾਲੀ ਹੋ ਬਹੁਤ ਚੰਕਲਾ ਰਹਾ ਆ ਦੇਖੀ ਆਤਲਾਂਗੀ ਕੇ ਤੇ ਖੋਲੀ ਹੋਈ ਰਹੀ ਕੋਈ ਠੀਕ ਹੈ ਆਣੀ ਲਿਖਿਆ ਕਿਰਤ ਤੁਰੇ ਪਰਵਾਨਾ ਐੜੇ ਕੇ ਤਾਂ ਪਕੜਦੇ ਲੋ ਇਹ ਤਾਂ ਤੁਸੀਂ ਜੋ ਆਪ ਸੋਚਦੇ ਹੋ ਉਹ ਕਰਦੇ ਹੋ ਜੇਦੀ ਕਰਤਨਾ ਤੁਹਾਡੀ ਆਪਣੀ ਸੋਚ ਤੇ ਹੀ ਹੈ ਇਹ ਤਾਂ ਖਾਲੀ ਹੈ ਇਹਦੇ ਵਿੱਚ ਤਾਂ ਕੁਝ ਨਹੀਂ ਇਹ ਚ ਹੈ ਸੋਚ ਵੀ ਤੁਹਾਡੀ ਆਪਣੀ ਹੋਰ ਅੱਛਾ ਗੱਲ ਕਰਦੀ ਵੀ ਨਹੀਂ ਇਹ ਵੀ ਤੁਹਾਡੇ 'ਚ ਪ੍ਰਵਾਨ ਕਰ ਲਿਆ ਕੰਮ ਤੁਸੀਂ ਉਹੀ ਕਰਦੇ ਜੋ ਮੰਨ ਲਿਆ ਹੋ ਗਰਮ ਠੀਕ ਹੈ। ਛੀਜੇ ਜੋਬਨ ਜਰਵਾ ਸਰਕਾਲ। ਪਾਇਆ ਛੀਜੇ ਭਈ ਸਿਦਾਲ। ਠੀਕ ਹੈ। ਜੋਬਨ ਜਰਵਾ ਸਰਕਾਲ। ਜੋਬਨ ਝਜਰੇ ਹੈ। ਜਰਾ ਰੋਗ ਨਾਲ। ਪੁਰਾਣਾ ਹੋ ਰਿਹਾ ਹੈ ਸਰੀਰ। ਛੀਜ ਰਿਹਾ ਜਿਵੇਂ ਕਪੜਾ ਛੀਜਿਆ ਆਪਣਾ ਪਰਾਣਾ ਹੋ ਗਿਆ ਪਰਾਣਾ ਹੋ ਰਿਹਾ ਕਿ ਜੈ ਜੋਬਨ ਜਰਵਾ ਸਰਕਾਲ ਕੁ ਜੇਲਾ ਰਹੋਗਾ ਸਰਤੇ ਬੜ ਕਾਲ ਹੈ ਸਰਤੇ ਅਕੇ ਸਮਾ ਸਮਾ ਨਾਲ ਸੈਕਿਆ ਨਹੀਂ ਬਰੋ ਹੋ ਜਾਣਾ ਸਰਵਾ ਸਰਕਾਲ ਕਾਇਆ ਚੀਜੇ ਪਈ ਸਿਬਾਲ ਕਾਇਆ ਵੀ ਚੀਜੇ ਪਈ ਸਿਬਾਲ ਜਾਲਾ ਦੇ ਵਿੱਚ ਭਰਪ ਦਾ ਜਾਲਾ ਪੈਦਾ ਹੋ ਜਾਂਦਾ ਹੋ ਕਾਇਆ ਭਰਪ ਦਾ ਜਾਲਾ ਪੈਦਾ ਪੈਂਦਾ ਬਾਲ ਲਈ ਕਾਇਆ ਉਹ ਜਿਹੜੀ ਕਿ ਸਿਵਾਲ ਤੋਂ ਕੀ ਭਾਬਾ ਜੀ ਬਲ ਰਹਿਤ ਹੋ ਜੇਗੀ ਸਿਵਾਲ ਜਾਲਾ ਪੈ ਜਾਊਗਾ ਅੱਛਾ ਜੀ ਜਾੜਾ ਉੱਤੇ ਜਾੜਾ ਜਾਲ ਅੱਛਾ ਜੀ ਅਗਿਆਨਤਾ ਫੈਲ ਜੂਗੀ ਜਿਉ ਜਿਉ ਐ ਜੇ ਨਹੀਂ ਦੁਰਗੁਤਾ ਨੇ ਇਹਨਾਂ ਲੈ ਕੇ ਆਇਆ ਵੀ ਰਣ ਪੂਜੀ ਦੁਰਗੁਤਲ ਠੀਕ ਹੈ